ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਰਾਹਿਮ ਕੀ ਵਾਰ ਕੀ ਤੋਂ ਨਹੀਂ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਧੀ ਨਾਹੀਂ ਗੁਰ ਕੈ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੀਂ ਇਹੋ ਜਗਤ ਜਿਹੜਾ ਇਹ ਬੁਬਤਾ ਮਰਿਆ ਪਿਆ ਮੁਭਤਾ ਹੁੰਦੀ ਆ ਆਪਣੇ ਸ਼ਰੀਰ ਦਾ ਮੋਹ ਨੂੰ ਮੁਭਤਾ ਕਹਿੰਦੇ ਨੇ ਦੂਜੇ ਦੇ ਸ਼ਰੀਰ ਦੇ ਮੋਹ ਨੂੰ ਮੁਭਤਾ ਨਹੀਂ ਕਹਿੰਦੇ ਉਹਨੂੰ ਉਹ ਮੋਹ ਕਹਿੰਦੇ ਸ਼ਰੀਰ ਦਾ ਮੋਹ ਮੁਭਤਾ ਦੇ ਸ਼ਰੀਰ ਦਾ ਮੋਹ ਮੁਭਤਾ ਹੁੰਦੀ ਅਸੀਂ ਗਲਤ ਨਫਸੇ ਇਸਤੇਮਾਲ ਕਰਦੇ ਕਿਉਂਕਿ ਸਾਹਿਬ ਤਾਂ ਇੱਕ ਤਰ੍ਹਾਂ ਲਿਖ ਦਿੱਤਾ ਗੁਰਬਾਣੀ ਚ ਬਾਭੂ ਉਚਾਰਤ ਭਿਆਸ ਕਿ ਤੋ ਸਾਬੋ ਗਿਆ ਕੇ ਰਬ ਮੈਂ ਹੁੰਦਾ ਠੀਕ ਹੈ ਬੇ ਜਿਹੜਾ ਹੈ ਬੇ ਵਿੱਚੇ ਬਬਤਾ ਛੁਪੀ ਹੋਈ ਹੈ ਬੇ ਕੁਝ ਹਾਲ ਸ਼ਰੀਰ ਸੁਣੇ ਮੇਰਾ ਵਜੂਦ ਹੈ ਇਹਨੂੰ ਬਬਤਾ ਕਹਿੰਦੇ ਦੂਏ ਦਾ ਵਜੂਦ ਬੱਕਰਾ ਦੂਏ ਦੇ ਵਜੂਦ ਨੂੰ ਬਬਤਾ ਨਹੀਂ ਕਹਿ ਸਕਦਾ ਉਹ ਕਹਿ ਸਕਦਾ ਕਿਉਂਕਿ ਮੈਨੂੰ ਦੀਨ ਹੈ ਦੀਨੇ ਨਾ ਨੂੰ ਲਗਾਓ ਹੈ ਦੁਸ਼ਮਣ ਦਾ ਦੁਸ਼ਮਣ ਵਾਲਾ ਲਗਾਓ ਹੈ ਬਿੱਤਰ ਹੈ ਤਾਂ ਬਿੱਤਰ ਵਾਲਾ ਲਗਾਓ ਹੈ ਗਾਹ ਹੈ ਤਾਂ ਗਾਹ ਵਾਲਾ ਲਗਾਓ ਹੈ ਜੇ ਗਹਿ ਹੈ ਜੀ ਗੁਰੂ ਹੈ ਤਾਂ ਗੁਰੂ ਵਾਲਾ ਲਗਾਓ ਹੈ ਉਹ ਹੈ ਜਿਆ ਲਗਾਓ ਹੈ ਜੇ ਜਿਆ ਤੇਰਾ ਉਧਰ ਨ ਸੰਬੰਧ ਹੈ ਕਿ ਮੁਬੱਤਾ ਰੂਪੀ ਜਗਤ ਹੈ ਜਿਹੜਾ ਸ਼ਰੀਰ ਨਾਲ ਜਿੰਨਾ ਰਚਿਆ ਮਚਿਆ ਹੋਇਆ ਕਰਕੇ ਦੁਬਤਾ ਹੈ ਸਰੀਰ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਸੁਭਈ ਜਾਏ ਸਾਨੂੰ ਕੋਈ ਬਤਾ ਸਕਦਾ। ਬਈ ਸਰੀਰ ਹੀ ਹੋਂ ਇਹਨਾਂ ਨੂੰ ਬਤਾ। ਇਹ ਮੂਆ ਮਾਇਆ ਪਿਆ। ਜਦੀਂ ਦੇ ਲੈਣਾ ਨਹੀਂ ਹੋਇਆ ਹੈ ਮਤਲਬ ਦੇਹੀ ਗੁਪਤ ਵਿਦੇਹੀ ਗੱਲ ਸਮਝਦਾ ਨਹੀਂ। ਨੋ ਦੇਹੀ ਦੇ ਜਾਣਦਾ ਬੜੇ ਤੂੰ ਤਾਂ ਜਾਣਦਾ ਹੀ ਨਹੀਂ। ਬਬਤਾ ਮੂਆ ਬਬਤਾ ਕਰਕੇ ਮਰਦਾ। ममता ਹੀ ਕਾਰਨ ਹੈ ਇਹ ਮਨੁੱਖ ਦਾ ਜੇ ਬੁੱਧਤਾ ਛੜਦੇ ਮਰਦਾ ਹੀ ਦੀ ਇਹ ਜੀਵਨ ਕੀ ਵਿਧੀ ਦੋਹੇ ਇਹੇ ਕਰਕੇ जीवन ਦੀ ਵਿਧੀ ਦੀ ਇਹ ਨੂੰ ਜੀਵਨ ਕੀ ਵਿਧੀ ਤਾਂ ਨਹੀਂ ਹੈ ਕਿ ਇਹਨੂੰ ਮਰਨ ਦੀ ਵਿਧੀ ਦਾ ਗਿਆਨ ਦੀ ਅਸਲ ਜੇ ਮਰਦਾ ਹੈ ਨਹੀਂ ਇਹ ਮਰਦਾ ਇਹਨੂੰ ਪਰਬ ਸਰੀਰ ਜਿਹੜਾ ਬੁੱਧਤਾ ਵਾਲਾ ਸਰੀਰ ਹੈ ਜੀਵਨ ਦੀ ਬਿਧੀ ਫਿਰ ਕਿਵੇਂ ਆਜਵੇਂਗੀ ਤਾਂ ਹੋਦੀ ਜੇ ਮੰਨ ਲੈਦਾ ਵੀ ਸਰੀਰ ਦੇ ਬਣਨਾ ਮਨਣਾ ਹੁੰਦਾ ਦੀ ਤੇ ਜੇ ਆਪਣਾ ਅਸਲ ਤੇ ਜੀਵਨ ਦੀ ਜਾਂ ਜਦ ਹੀ ਮਰਨ ਦੀ ਜਾਂ ਜਦ ਉਹ ਮਰਨ ਜਾਂ ਜਦ ਹੀ ਸਰੀਰ ਜੱਡਣ ਨੂੰ ਬੰਨ ਲਵਦਾ ਚਾਹ ਮੋਰ ਕਟਿਆ ਕਰੀਏ ਨਾ ਤੇ ਕਬ ਮੋਰ ਬਣਦਾ ਸਾਮਾਨ ਮੂਰ ਇਕੱਠਾ ਕਰੀਏ ਕਮਹਾਨ ਮੂਰ ਕੋ ਬੰਦਾ ਸਾਮਾਨ ਮੂਰ ਕਰੀਏ ਠਾ ਇੱਕ ਵਿਦਵਾਨ ਬਣਦਾ ਤਾਂ ਇਹਨਾਂ ਸਾਰੇ ਬਗਲ ਲਾਇਏ ਮੂਰ ਕੋ ਨੇ ਤਾਂ ਇਹੋ ਜੀ ਆਂਦੀ ਬਗਲ ਲਾਦੀ ਉਹ ਜੇ ਲੋਕ ਘਰਾਬ ਘੜ ਲੈ ਜਰ ਘੜ ਕੇ ਦੋਈ ਵਾਰ ਫੇਰੋ ਸਿਰ ਉਪਾਕੇ ਘੜ ਲੈ ਜਰ ਉਹ ਤੇਜ ਹੋ ਜਾਂਦੀ ਹੈ ਤੇ 30 ਵਾਰ ਘੜ ਲਈਏ ਫੇਰ ਨਸਰੇ ਲੱਗ ਜਾਂਦੀ ਹੈ ਗੱਲ ਇਹ ਵਿਦਵਾਨ ਹੋਣੇ ਤਾਂ ਇਹੋ ਜੀ ਬੰਦੇ ਨੇ ਠੀਕ ਹੈ ਜੀ ਕਹਿੰਦਾ ਭਾਬਾ ਕਿ ਚੇਤਨ ਨੂੰ ਮਾਰਨਾ ਸੀ ਜਿਹੜਾ ਮਨ ਸੀਗਾ ਉਹਨੂੰ ਨਹੀਂ ਮਾਰਨਦਾ ਵਿਧੀ ਪਤਾ ਲੱਗੀ ਸਿਰਫ ਜੜ ਦੀ ਮੌਤ ਨੂੰ ਮੌਤ ਸਮਝਣ ਲੱਗ ਗਿਆ ਚੇਤਨ ਤਾਂ ਮਰਦਾ ਹੀ ਨਹੀਂ ਹੈ ਉਹ ਕਾਹਨੂੰ ਮਰਦਾ ਹੈ ਜਿੱਦਣ ਇਹਨੂੰ ਮਿਜਵਾ ਗਿਆ ਚੇਤਨ ਵੀ ਵਰਦਾ ਹੈ ਮੌਤੋ ਨਹੀਂ ਦੱਸਦਾ ਇਹ ਡਰਦਾ ਹੀ ਹੋਣਾ ਜਾਂਦਾ ਕਿ ਮੌਤ ਤੇ ਜਿੱਦਾਂ ਜਰੇ ਸਰੀਰ ਦੇ ਪੰਜ ਤਤਾਂ ਨੂੰ ਅਲੱਗ ਹੋਣ ਨੂੰ ਬਲ ਲੱਗਦਾ ਜਿਦ ਤਨ ਨੂੰ ਬਦਲ ਲਾਗਾ ਚੇਤਨੀਵਾਸਾ ਫੇਰ ਕਦੋਂ ਮੌਤ ਹੋ ਰਵੇ ਉਹਨੇ ਸੇਹ ਲੜਦੇ ਤੇ ਹੀਤੀਆਂ ਬੋਲਦੇ ਤੇ ਉਹਨਾਂ ਨੂੰ ਪਤਾ ਦਾ ਸਿੱਧਾ ਮਰਨ ਨਹੀਂ ਹੈ ਜਾਂ ਲੈ ਲਣਗੇ ਉਹ ਇਹਨਾਂ ਦੇ ਪ੍ਰੈਕਟੀਕਲ ਜੀਵਨ ਦੇ ਬੰਦੀ ਜਿਉਣ ਦੀ ਇੱਛਾ ਮਾਨਦੀ ਸੀ ਵਰਲਡ ਕਬੂਲ ਕਰ ਫੈਨਲ ਵਰਲਡ ਕਬੂਲ ਉਹ ਮਾਰ ਘਾਣਾ ਮਾਰਨਾ ਤਾਂ ਬੰਦੀ ਦਾ ਜਿਉਣ ਦੀ ਇੱਛਾ ਮਾਨਦੀ ਸੀ ਜਾਂ ਛੜਤੀ ਛਾ ਕਬੀਰ ਦੇ ਫੇਰ ਉਹ ਦਰਵਾਜ਼ਾ ਕਰਨ ਲੱਗਾ ਆਪ ਕੈਸੇ ਮਰੂ ਮਰ ਬੰਬਲੇ ਉਸ ਤੇ ਮਰਨਾ ਚਾਹਉਂਦਾ ਮੇਰਾ ਬੁੱਲ ਮਰੂ ਚਾਹੁੰਦਾ ਹੁਣ ਕੈਸੇ ਮਰੂ ਵਰਮਾ ਗਿਆ ਜਿਹਨੇ ਰਾਮ ਨਹੀਂ ਜਾਣਿਆ ਮਰ ਕੇ ਤਾਂ ਉਹ ਗਏ ਨਹੀਂ ਜਿਹਨੇ ਰਾਮ ਨਹੀਂ ਜਾਣਿਆ ਤੇ ਹੁਣ ਸੱਚ ਕੱਢ ਦੂ ਕਿ ਉਹ ਤੇ ਬਲੋਕ ਜਿਹਦੇ ਰਾਮ ਨਹੀਂ ਜਾਣਦੇ ਜਿਹਨੇ ਰਾਮ ਜਾਣ ਲਿਆ ਉਹ ਸੱਚ ਉਹ ਵੀ ਜਾਣਦੇ ਨੇ ਗੁਰੂ ਅਬਦੁੱਲ ਜਿਉਂਦੇ ਜਾਂਦੇ ਨੇ ਮਤਮਾ ਪਿੱਛੇ ਕੋਈ ਲੋਭ ਨਹੀਂ ਤੋ ਨ ਪਾਇਆ ਸੰਤ ਮਾਰੇ ਕਹੋ ਰੋਇ ਇਹ ਜੋ ਆਪਣੇ ਘਰ ਜਾਏ ਉਹ ਤਾਂ ਆਪਣੇ ਘਰ ਲੁਜਾਰੇ ਉਹ ਜੂਦਾ ਜਾ ਰਿਹਾ ਤੂੰ ਜੀ ਰੋ ਦੇ ਗੁਰ ਕੇ ਭਾਣੇ ਜੋ ਚੱਲੈ ਜੀਵਨ ਪਦਵੀ ਪਾ ਭਾਣੇ ਜੋ ਚੱਲੈ ਉਹ ਜੇ ਮਰ ਗਿਆ ਫੇ ਚੱਲੂ ਕਿਵੇਂ ਜੇ ਭਾਂ ਮਰ ਗਿਆ ਗੁਰ ਕੇ ਭਾਂੇ ਕੇਵੇਂ ਚੱਲੂ ਮਰਿਆ ਨਹੀਂ ਸਕਦਾ ਹੁੰਦਾ ਉਹਦੀ ਮਰਜ਼ੀ ਮਾਰੀ ਆ ਬੰਦੀ ਉਹਦੀ ਮਰਜ਼ੀ ਸੀ ਆਪਣੀ ਮਰਜ਼ੀ ਦੇ ਚੱਲਦਾ ਤਾਂ ਉਹ ਮਾਰਦੀ ਕੋਈ ਬੋਲਦਾ ਮਰਨਾ ਥੁਰ ਬੁਰਕੇ ਪੜਨ ਚੱਲਦਾ ਹੈ ਉਹਨੇ ਜਿਉਦਾ ਜੀਵਨ ਭਰ ਵੀ ਹੁਣ ਜਿਉਦਾ ਜਿਉਦਾ ਹੀ ਰਹੂਗਾ ਕੋਈ ਉਹ ਕੋਈ ਮਾਰ ਸਕਦਾ ਛੇ ਬੁਰਕੇ ਪੜਨ ਚੱਲੂਗਾ ਉਹਨੂੰ ਮਾਰਨ ਵਾਲਾ ਕੋਈ ਜੱਗਈ ਨਹੀਂ ਉਹ ਗੋਲ ਨਹੀਂ ਮਾਰਨੇ ਉਹਦਾ ਦਾ ਉਹਦੇ ਦਾ ਬੰਦਾ ਬਣ ਗਿਆ ਆਪਣੇ ਬੰਧਨ ਵੀ ਉਹ ਮਾਰਦਾ ਹੁੰਦਾ ਆਪਣੇ ਸੇਬ ਗੁਰੂ ਕੋਲ ਮਾਰਦਾ ਹੁੰਦਾ ਠੀਕ ਹੈ ਹੋਜੀ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿੱਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖੀ ਸਹਿਜ ਸਮਾਏ ਓ ਸਦਾ ਸਦਾ ਜਨ ਜੀਵਤੇ ਉਹ ਜਨਤਾ ਸਦਾ ਹੀ ਸਦਾ ਜੁੰਦੇ ਰਹਿੰਦੇ ਨੇ ਜੋ ਗੁਰ ਚਰਣੀ ਚਿੱਤ ਲਾਹੇ ਹਰ ਜਿਹੜਾ ਆਪਣੀ ਮਰਜ਼ੀ ਤਿਆਕ ਕੇ ਦਰਚਰਨ ਦੇ ਨਾਲ ਜਿਤਲਾ ਲਵੇ ਉਹ ਹਰ ਚਰਣੀ ਜਿਤ ਲਾਏ। ਹਰ ਚਰਣੀ ਜਿਤ ਲਾਏ ਦਰਚਰਨ ਜਿਤ ਲਾਏ ਉਹ ਮਨੋਂ ਪੇ ਜਿਹੜਾ ਦੱਸਵੇ ਪਹਿਲਾਂ ਆਪ ਬੁਠਾ ਦੇਖਦੇ ਬੈ ਚਲਣਾ ਜਿਤ ਲਾਦੇ ਬਗੜੇ ਬੰਦੇ ਨੂੰ। ਮਨ ਬੂਰੇ ਹੋ ਕੇ ਦੇਖਦੇ ਜਿਹੜੇ ਲਵਾ ਬੂਰੇ ਕਰਕੇ ਕਹਿਣਾ ਮਥਾ ਦੇਖਦੇ ਆਪੇ ਛੋਟੇ ਦੇਖਦੇ। ਪਰ ਜੇ ਮਨ ਮੰਨਦਾ ਤਾਂ ਦੇਖਦਾ। ਹਾਂ ਨਾਨਕ ਨਦਰੀ ਮਨ ਵਸੈ ਗੁਰਮੁਖੀ ਸਹਿਜ ਸਮਾਏ ਦੋਨ ਕਹਿਣ ਜੇ ਕਿਰਪਾ ਹੋਜੇ ਬੇ ਦੋਲ ਬਸੈ ਬੋਲ ਤੇ ਜਾਂਦਾ ਜੇ ਪਰਮੇਸ਼ਰ ਦੀ ਨਜ਼ਰ ਹੋਜੇ ਇਹ ਨਿਹਾਲ ਬੋਲ ਤੇ ਜਾਂਦਾ ਗੁਰਮੁਖੀ ਸਹਿਜ ਸੁਭਾਏ ਗੁਰਮੁਖੀ ਬੁੱਧੀ ਗੁਰਮੁਖੀ ਹੋ ਜਾਂਦੀ ਹੈ ਸਹਿਜ ਅਵਸਥਾ ਦਾ ਉਹਦਾ ਸੁਭਾਅ ਹੋ ਜਾਂਦਾ ਚਲੋ ਆਵਦਾ ਕਿੱਥੇ ਹੋ ਰਹਿਣ ਲੱਗ ਗਏ महल्ला तीजा अंदर सहसा दुख है आपे सिर मार दूजे पाए सुत्ते कवे ना जागे माया मोह प्यार उधर तल सहसा सुख कामादा दुख है तारा दुख है आपे सिर तंदे मार आपकी की गल ने कै दवा दवा भाणने लगया टड़के ते ਜਨਾਨ ਕਰਦਾ ਉਹ ਤਾਂ ਦਿਨੂ ਸਿਰ ਮਾਰ ਲੱਗਿਆ ਆ ਐਸਾ ਤੰਤਰੋਂ ਜਾ ਨਹੀਂ ਰਿਹਾ ਓਏ ਆ ਜਿਹੜਾ ਤਾਂ ਦਿਨੂ ਸਿਰ ਮਾਰਦਾ ਰੋਜ ਉੱਠ ਕੇ ਬਿਮਾਰੀ ਦਾ ਜਾ ਨਹੀਂ ਦਵਾਈ ਇੱਕ ਅਕਸ ਕਿ ਟਬਣੀ ਇਹਦੇ ਕਰਦਾ ਦਵਾਈ ਪੂਰੇ ਟਾਈਮ ਤੇ ਪੀ ਓਹ ਤੰਦਾ ਤੇਰਾ ਧਰਮ ਦੀ ਤੰਦੇ ਤੂੰ ਸਿਰ ਮਾਰ ਲੱਗਿਆ ਧਰਮ ਤਾਲਣ ਕਰਦਾ ਐਸਾ ਦੁੱਖ ਜਾਊਗਾ ਕਾਹਦੇ ਕਾਢੀ ਜਿਹੜੇ ਧਰਬ ਦੇ ਫਿਰ ਮਾਰਦੇ ਨੇ ਤਾਂ ਦੇ ਦੂ 2 ਵਜੇ ਤੇ ਉੱਠ ਕੇ ਤੇ ਐ ਸਵੇਰ ਜੋ ਪਾਰਟੀ ਆ ਨਾ ਸੱਦਾ ਪੁੱਛਦੇ ਨੇ ਹੋ ਜੇ ਕੈਸਾ ਤੋਂ ਖਲੀ ਕਿੱਥੇ ਜਾ ਰਿਹਾ ਤਾਂ ਦਈਏ ਉਹ ਕੀ ਹੈ ਪ੍ਰੈਕਟੀਕਲ ਕਰਕੇ ਦਿਖਾਉਣ ਪ੍ਰੈਕਟੀਕਲ ਕਰਕੇ ਦੁਜੇ ਪਾਇ ਸੁੱਤੇ ਕਦੇ ਨਾ ਜਾਗੈਂ ਮਾਇਆ ਮੋਹ ਪਿਆਰ ਜਿਹਨਾਂ ਨੂੰ ਮਾਇਆ ਦੀ ਭੁੱਖ ਹੈ ਉਹ ਤਾਂ ਬਾਈ ਆਪਣੇ ਸੁੱਤੇ ਨੇ ਉਹ ਤਾਂ ਇਹ ਜੱਗ ਜਾਗਦੇ ਨੇ ਉਹਦਾ ਕੰਨ ਨੇ ਗੁਰਦੁਆਰੇ ਦੇ ਜਿਹੜੇ ਘਰ ਹੈ ਉਹਨੇ ਕੱਢ ਖਾ ਲੇ ਕੰਨੇ ਜਿਹੜੇ ਰੁੜੀ ਬਣਦੇ ਆ ਬੇਨਾਂ ਨੇ ਸਾਖੇ ਪ੍ਰਾਪਤ ਕਰ ਲਾਂ ਸਾਡੇ ਜਾਣਾਂ ਨੂੰ ਇਹਨਾਂ ਨੇ ਸਾਖੇ ਜੋ ਅੱਗੇ ਛੱਡ ਇਹਨਾਂ ਦਾ ਗੋਲ-ਗੋਲ ਕਰਈ ਐ ਗੋਲਕ ਜੋ ਤਨਖਾਹ ਲੈ ਲਾਦੇ ਨੇ ਅਸਰ ਕਰਦੇ ਨੇ ਬਾਣੀ ਦਾ ਕੋਈ ਨਹੀਂ ਸਾਡੇ ਦੇੜੇ ਠਗਾ ਕੇ ਖਾਣੇ ਉਹਨਾਂ ਦਾ ਵੀ ਬੇੜਾ ਕਰਦੇ ਨੇ ਉਹਨਾਂ ਦਾ ਬੇੜਾ ਕਰਦੇ ਨੇ ਆਪਣੀ ਕਿਉਂਦਰ ਇਹਨਾਂ ਦੀ ਸਿਰ ਤੱਕ ਦਰਦਿਆਂ ਫਰਮਾਦਰ ਹੋਰ ਕੁਛ ਨਹੀਂ ਜੀ ਰੋਲ ਮਾੜੋਡ ਗੋੜ ਕੀ ਪੈਦਾ ਕੀਤਾ ਤੁਸੀਂ ਕੋਈ ਸਿੱਖੀ ਪੈਦਾ ਕੀਤੀ ਇਹਨਾਂ ਹਾਈ ਕੋਰਟ ਜਾ ਕੇ ਲਗਾ ਦੇਣਾ ਸਖਈ ਦੀ ਕੋਈ ਤੁਰੀ ਕੀ ਕਰਦੇ ਆ ਬਈ ਧੱਦੇ ਮਾਰਦੇ ਹੋਰ ਕੀ ਕਰਦੇ ਹੋ ਹੋ ਜੀ ਠੀਕ ਹੈ ਜੀ ਦੂਜੇ ਭਾਏ ਸੁੱਤੇ ਕਬੇ ਨਾ ਜਾਗੈਂ ਮਾਇਆ ਮੋਹ ਪਿਆਰ ਉਹ ਤਾਂ ਵਿਚਾਰੇ ਮਾਇਆ ਮੋਹ ਨਾਲ ਪਿਆਰ ਨੇ ਉੱਠ ਆਪਣੇ ਥੱਲੇ ਲੱਗ ਜਾਂਗੇ ਕਦ ਕਦ ਮਾਇਆ ਨਾਲ ਉਹਦੇ ਚੱਬਰ ਲੈਣਗੇ ਥੋੜੇ ਨਾਲ ਜ਼ਰੂਰ ਕਰਦੇ ਕੋਈ ਤਕਾ ਬੁਟਾ ਕਰਦੇ ਨਹੀਂ ਵੰਦਾਰੀ ਦਾ ਜਿਹੜਾ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਉਹਨਾਂ ਤੇ ਹਲਕ ਤੋਂ ਥੱਲੇ ਦੀ ਉਤਰਦੀ ਉਹ ਗੱਲ। ਕਿਉਂ ਨਹੀਂ ਉਤਰਦੀ ਉਹਨਾਂ ਦੀ ਗੱਲ ਥੱਲੇ ਹਲਕ ਤੋਂ? ਸੈਕਟਿਕਲੀ ਨਾਮ ਨਾ ਚੇਤ ਹੈ, ਨਾ ਵਿਚਾਰ ਹੈ, ਮਨਮੁਖ ਦਾ ਆਚਾਰ। ਜਹ ਨਾਮ ਹੈਗਾ ਕੁਰਬਾਨੀ ਚ। ਹਾਂ ਸਮਝ ਵੀ ਆ ਜਾਂਦਾ ਸ਼ਬਦ ਵੀ ਵਿਚਾਰ ਲੰਦਾ ਕੋਈ ਨਾ ਕੋਈ ਸੁਣ ਵੀ ਲੈਂਦੇ ਨੇ ਸਮਝ ਵੀ ਆ ਜਾਂਦਾ ਫੱਟੇ ਦਨੀਆਣਾ ਚੇਤਾ ਦੀ ਰੱਖਦੇ ਜਦੇ ਉੱਤੇ ਸੁਣੀ ਦੂਏ ਗੱਲ ਘੜ ਦਿੰਦੇ ਚੇਤ ਦੇ ਨੀ ਬਈ ਪਾਈਆ ਗੱਲ ਕਹਿਤੀ ਇਹਦਾ ਚੇਤਾ ਰੱਖੋ ਇਹ ਤੋਂ ਕੁਝ ਪ੍ਰਾਪਤੀ ਹੋਊਗੀ ਚੇਤ ਦੇ ਵੀ ਸਭ ਦਰਾਂ ਚੇਤੇ ਹਾਂ ਜੇ ਨਾਮ ਨੂੰ ਨਹੀਂ ਚੇਤਦੇ ਤਾਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਸ਼ਬਦ ਵਿਚਾਰ ਕਰਨ ਦੇ ਤਾਂ ਹੀ ਨਾਮ ਮਿਲੂ ਵਿੱਚੋ ਤਾਂ ਹੀ ਜੇਤਣਗੇ ਬਲਮੁਖਾ ਨਾ ਆਚਰਣੇ ਬਲਮੁਖ ਨੇ ਸਾਰੇ ਬਜਿਆ ਦਾ ਕੋਈ ਨਹੀਂ ਆਉਣਾ ਬੁਰਗੋਲੇ ਮੈਨੂੰ ਲੱਗਦਾ ਇਹ ਬਜ ਗਿਆ ਉਹ ਵਿਚਾਰਾ ਘੁੱਡੇ ਲੈਣ ਲੱਗਿਆ ਹੋ ਹਾਂਜੀ ਕਿਉਂਕਿ ਸ਼ਬਦ ਜਿਨਾਂ ਸ਼ਬਦ ਵਿਚਾਰ ਕਰਦੀਆਂ ਦੂਹ ਦਿਨ ਆਇਓ ਨੇ ਹਾਂਜੀ ਉਹ ਕਰੇ ਦੇਹੁ ਆਹ ਉਹ ਦੜੀ ਦਿਨ ਅਸਤੇ ਫਿਰ ਫੇਰ ਨਾ ਕਿਉਂ ਦੋ ਸਦੀ ਬੈਠੀ ਕਰਕੇ ਗੱਡਾ ਤੇ ਠੀਕ ਹੈ ਜੀ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਮਨਮੁਖ ਦਾ ਆਚਾਰ ਮਨਮੁਖ ਦਾ ਆਚਾਰ ਨਹੀਂ ਹੈ ਹਰ ਨਾਮ ਨਾ ਪਾਇਆ ਜਨਮ ਵਿਰਥਾ ਗਵਾਇਆ ਨਾਨਕ ਜੰਮ ਮਾਰ ਕਰੇ ਜੇ ਹਾਲ ਨਾ ਲਵ ਲੈ ਪਾਇਆ ਸ਼ਬਦ ਨਹੀਂ ਬਚਾ ਲਿਆ ਤਾਂ ਫਿਰ ਸਿੱਖ ਬਣਦਾ ਕੀ ਫਾਇਦਾ ਸੀ ਭਾਈ ਸ਼ਬਦ ਬਚਾ ਲਿਆ ਦੀ ਦੀ ਨਾ ਨਾ ਪਾਇਆ ਜਨਮ ਬਵਾਇਆ ਜਨਮ ਹੁ ਬਵਾ ਲਿਆ ਉਹ ਸਾਰੀ ਜ਼ਿੰਦਗੀ ਜਾਣ ਦਾ ਕੀ ਫਾਇਦਾ ਸੀ ਜੇ ਫਿਰ ਵੀ ਜਨਮ ਚਲੇ ਗਿਆ ਤੁਹਾਡਾ ਕੋ ਗਿਆ ਫਿਰ ਪਖੜ ਵਾਸਤੇ ਤੁਹਾਡਾ ਹੋਰ ਕੁਝ ਨਹੀਂ ਸੀ ਜੇ ਗੁਰਦਾਰੇ ਸਾਰੀ ਉਮਰ ਜਾਣ ਦੇ ਵਿੱਚ ਵੀ ਜਨਮ ਅਜਾਈ ਚਲਾ ਗਿਆ ਨਾਭ ਨਹੀਂ ਪਾਇਆ ਤੁਸੀਂ ਐਕਸੈਪਟੇ ਨਹੀਂ ਕੀਤਾ ਇੱਕ ਵੀ ਲਫ਼ਜ਼ ਫਿਰ ਤਾਂ ਜਲ ਬਚਲੇਗਾ ਸੋਣੇ ਤਾਂ ਉਹ ਚੰਗੇ ਨੇ ਜਿਹੜੇ ਗਏ ਸੀ ਉਹ ਗਏ ਨਹੀਂ ਕੋਲਕਤੋਂ ਤਾਂ ਦਰਦੇ ਨੇ ਉਹ ਜਾਂਦੇ ਜਾਂਦੇ ਸੜਕ ਤੇ ਸਕੂਟਰ ਦਾ ਇੱਕ ਹੱਥ ਛੱਡ ਕੇ ਚਾਹੇ ਸਸਰਾ ਹੋ ਜਵੇ ਉਹਨਾਂ ਨੂੰ ਪਰ ਨਾਮ ਨਾ ਪਾਇਆ ਜਨਮ ਵਿੱਥਾ ਗਵਾਇਆ ਨਾਨਕ ਜੰਮ ਮਾਰ ਕਰੇ ਖੁਆਰ ਜਦੋਂ ਕਹਾਂ ਜਮ ਮਾਰ ਕੇ ਖਵਾਰ ਕਰੂਗਾ ਖਵਾਰੀ ਕਰੂਗਾ ਜਦ ਉਹਨਾਂ ਦੀ ਵੀ ਕਰੂ ਤੇਰੀ ਵੀ ਕਰੂ ਤੇਰੀ ਜ਼ਿਆਦਾ ਕਰੂਗੀ ਕਰੋ ਕਿਉਂ ਤੈ 골ਕਤੇ ਪੈਸੇ ਖਾਦੇ ਨੇ ਜਿਹੜਾ 골ਕਤੇ ਪੈਸੇ ਖਾਦੇ ਨੇ ਗੁਰੂ ਦੇ ਤਾਂ ਖਰਾ ਖਾਦਾ ਹੈ ਥੋੜੇ ਹੈ ਉਹਨਾਂ ਨੂੰ ਜਰਾ ਅਲਰਟ ਹੋ ਜਾਣਾ ਚਾਹੀਦਾ ਠੀਕ ਨੂੰ ਅਲਰਟ ਕਰ ਦਿੱਤਾ ਕਰ ਦਿੱਤਾ ਅਲਰਟ ਦੱਸ ਦਿੱਤਾ ਵੀ ਉਹਨਾਂ ਦੇ ਉਹਨਾਂ ਦੇ ਫਟਾ ਦੂਆ ਫਿਰੂਗਾ ਇੱਕਨਾਂ ਦੇ ਝਿੜਖਾ ਪਹਿਣ ਕੇ ਆ ਇੱਕਨਾਂ ਦੇ ਫਟਾ ਫਿਰੂਗਾ ਫਟਾ ਵੀ ਉਹ ਫੇਰ ਨਗੇ ਜਿਨ੍ਹਾਂ ਨੂੰ ਹਾਰ ਕੀਤਾ ਉਹ ਖੰਡ ਪਾੜ ਦੋਤੇ ਕਰੋਗੇ ਰਹੇ ਨਹੀਂ ਦੋ ਦੋ ਸੌ ਕਰੋ ਤੇ ਤਿੰਨ ਸੌ ਕਰੋ ਭਾਰੋ ਦਾ ਕੋਈ ਹੋਇਆ ਦੀ ਇਹਨਾਂ ਦੇ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਆਪਣਾ ਆਪ ਪਾਇਨ ਤਦ ਹੋਰ ਨਾ ਕੋਈ ਜਿਸ ਵਕਤ ਆਪਣਾ ਉਹਨੇ ਬਸਲ ਬਣਾਇਆ ਰਚਨਾ ਰਚਦਾ ਮਤਾ ਬਸੂਰਤ ਕੀਤਾ ਆਪਣਾ ਆਪ ਪੈਦਾ ਕੀਤਾ ਆਪਣਾ ਕੀ ਪੈਦਾ ਕੀਤਾ ਆਪਣਾ ਉਹ ਪੈਦਾ ਕੀਤਾ ਆਪਣੀ ਇੱਛਾ ਪੈਦਾ ਕੀਤੀ ਹੈ ਸੰਸਾਰ ਅਚਲ ਦੀ ਆਪਣੀ ਇੱਛਾ ਪੈਦਾ ਕਰਨਾ ਹੀ ਆਪਣਾ ਪੈਦਾ ਕਰਨਾ ਸਲਾਹ ਤੋਂ ਜਵਰਾਣ ਦੀ ਮਤਾ ਮਸੂਰਤ ਨਹੀਂ ਕੀਤੀ ਕਿਸੇ ਨੂੰ ਫਾਕਾੜ ਜਿਹੜਾ ਸੀ ਸੱਚ ਸਾਡੇ ਸੱਚਖੰਡ ਦੀ ਕੁਸਲਾ ਏ ਇਹ ਜੱਦੀ ਗੱਲ ਹੈ ਜੀ ਹਾਂ ਤੋਂ ਸਰਗੁਣ ਥੀ ਆ ਠੀਕ ਹੈ ਜੀ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਆ ਮਤਾ ਮਸੂਰਤ ਆਪੇ ਕਰਦਾ ਆਪਣੀ ਸਲਾਹ ਆਪੇ ਕਰਦਾ ਆਪਣਾ مشورہ ਆਪੇ ਕਰਦਾ ਆਪਣੀ ਵਰਕੀ ਕਰਦਾ ਇਹਨਾਂ ਲੋ ਹੋ ਜਾਂਦਾ ਤਦੋਂ ਆਕਾਸ਼ ਨਾ ਪਾਤਾਲ ਹੈ ਨਾ ਤਰੈ ਲੋਈ ਉਦੋਂ ਆ ਆਕਾਸ਼ ਆ ਨਾ ਪਾਤਾਲ ਨਾ ਤਰੈ ਲੋਕ ਨੇ ਅੱਠਵੀਂ ਵਾਰ ਫਿਰ ਦੂਵੀਂ ਵਾਰ ਫੇਰ ਗੱਲ ਇਹੀ ਹੈ ਦੀ ਨਾ ਤਰੈ ਲੋਕ ਨੇ ਫਿਰ ਯੁਗ ਚਾਰ ਮਾਇਆ ਜਿਵੇਂ ਆਗੇ ਫਿਰ ਯੁਗ ਕਿਹੜਾ ਫਿਰ ਇਹ ਸੱਜੂ ਸੀ ਉਦੋਂ ਅਸਲ ਤਿੰਨ ਯੁਗ ਪੈਦਾ ਕੀਤੇ ਨੇ ਉਹਦੇ ਚੌਥਾ ਨਹੀਂ ਕੀਤਾ ਪੈਦਾ ਚੌਥੇ ਯੁਗ ਹੁੰਦਾ ਹੀ ਹੋ ਠੀਕ ਹੈ ਜੀ ਆਪਾਂ ਚਾਰ ਇੱਥੇ ਗਿਣਾਂਗੇ ਫਿਰ ਤਾਂ ਪੰਜ ਯੁੱਗ ਹੋ ਜਾਣਗੇ ਹਾਂਜੀ ਇਹ ਇਹ ਯੁੱਗ ਸਾਡੇ ਸਾਡੇ ਵਿੱਚ ਨਹੀਂ ਹੈ ਮੇਰਾ ਭੇਦ ਠੀਕ ਹੈ ਜੀ ਤਾਂ ਭੇਦ ਨਹੀਂ ਹੈ ਤੇ ਸਾਰਾ ਕੁਝ ਬਦਲਾ ਪੈ ਗਿਆ ਉਹ ਤਾਂ ਸਾਰਾ ਇਸ ਤੋਂ ਬਾਅਦ ਗੁਰਮਤ ਦੇ ਚਾਰ ਯੁੱਗ ਹੈ ਤਿੰਨ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਉਦੋਂ ਆਪੇ ਆਪ ਨਿਰੰਕਾਰ ਹੈ ਉਦੋਂ ਕੋਈ ਚੀਜ਼ ਉਤਪਤੀ ਹੋਏ ਨਹੀਂ ਰਹੀ ਇਹ ਜਿਹੜਾ ਟਾਈਮ ਲਈ ਹੋ ਰਹੀ ਇਹ ਸਤਜਗ ਹੈ ਸਤਜਗ ਦੇ ਵਿੱਚ ਨਾ ਕੋਈ ਸ਼ਬਦ ਹੈ ਨਾ ਕੋਈ ਬੁੱਝਦਾ ਜਿਉਂ ਤਿਸ ਭਾਵ ਹੈ ਤਿਵੇਂ ਕਰੇ ਤਿਸ ਬਿਨ ਅਵਰ ਨ ਕੋਈ ਜੋ ਤੇਵਾ ਹੈ ਜਿਹੜੀ ਉਹਦੀ ਰਗਾ ਹੁੰਦੀ ਹੈ ਜਿਵੇਂ ਉਹਦੀ ਮਰਜ਼ੀ ਉਹਦੀ ਉਹਦੇ ਕਰਦਾ ਹੈ ਇਸ ਬਿਨਾ ਬਲ ਨਾ ਹੋਰ ਕੋਈ ਦਖਲ ਨਹੀਂ ਦੇ ਸਕਦਾ ਨਾ ਕੋਈ ਹੁੰਦਾ ਨਾ ਕੋਈ ਦਖਲ ਦੇ ਸਕਦਾ ਜੀਵ ਤਾਂ ਚ ਪੈਦਾ ਹੁੰਦੇ ਨੇ ਇਹ ਬਹੁਤ ਬਾਅਦ ਪੈਦਾ ਹੁੰਦੇ ਨੇ ਉਹ ਤੋਂ ਪਹਿਲਾਂ ਦਾ ਤਤ ਪੈਦਾ ਹੁੰਦੇ ਨੇ ਸਾਚੇ ਦੇ ਪੌਣਾ ਪਿਆ ਪੌਣਾ ਦੇ ਜਲ ਹੋਏ ਸਾਰਿਆਂ ਤੋਂ ਬਾਅਦ ਆਦਮੀ ਪੈਦਾ ਹੁੰਦਾ ਜੇ ਆਪਾਂ ਧਰਤੀ ਦੀ ਖੋਜ ਦੇਖੀ ਉਹ ਕਹਿੰਦੇ 6 ਬਿਲੀਅਨ ਸਾਲ ਪਹਿਲਾਂ ਹੋਈ ਸੀ ਪਰ 4 ਬਿਲੀਅਨ ਸਾਲ ਤੱਕ ਜੀਵ ਹੋਇਆ ਹੀ ਨਹੀਂ ਬਿਲਕੁਲ ਸਹੀ ਗੱਲ ਹੈ ਉਸ ਤੋਂ ਬਾਅਦ ਪਹਿਲਾ ਜੀਵ ਜਿਹੜਾ ਹੈ ਉਹ ਜਲ ਵਿੱਚ ਬੈਕਟੀਰੀਆ ਪੈਦਾ ਹੋਇਆ ਸੀ ਉਹ 2 ਬਿਲੀਅਨ ਸਾਲ ਪਹਿਲਾਂ ਪੈਦਾ ਹੋਇਆ ਗੁਰਬਾਣੀ ਇਹ ਗੱਲ ਕਹਿੰਦੀ ਹੈ ਇਸ ਕਰਕੇ ਵੀ ਦੁਨੀਆਂ ਨੇ ਤੁਗਾ ਲੈਣ ਆ ਜਿਹੜੇ ਦੂਏ ਨੇ ਨਾ ਬਹੁਤੇ ਸੱਚੇ ਇਹਨਾਂ ਨੂੰ ਚੁੱਪ ਕਰ ਜਾਂਦੇ